ਹਾਥ ਪ੍ਰਿਥਰਾਜਾ ਕੋ ਰਾਜ ਕਥ ਸੰ ਤੋਟਕ ਛੰਦ ਕਹ ਲਾਗਣੋਂ ਨਿਭਜੋਂਨ ਪਏ ਪ੍ਰਭ ਜੋਤੈ ਜੋਤ ਮਿਲਾਏ ਲਏ ਪੁਨ ਸ੍ਰੀ ਪ੍ਰਿਥਰਾਜ ਪ੍ਰਿਥੀ ਇਸ ਭਇਓ ਜਿਨ ਬਿਪਨ ਦਾਨ ਦੁਰੰਤ ਦਇਓ ਦਲ ਲੈ ਦਿਨ ਏਕ ਸਿਖਾਰ ਚੜੇ ਬਨ ਨਿਰਦਨ ਮੋ ਲਖ ਬਾਗ ਬੜੇ ਤਹਨਾਰ ਸੁਕੁੰਤਲ ਤੇਜ ਤਰੇ ਸਦ ਸੂਰਜ ਕੀ ਲਖ ਕ੍ਰਾਂਤ ਹਰੇ ਹਰ ਬੋਲ ਮਨਾ ਛੰਦ ਤਾ ਜਾਤ ਪੈ ਮ੍ਰਿਗ ਘਾਤ ਕੈ ਇਕ ਦੇਖ ਕੁਟੀਜਨ ਜੋਗ ਜੁਟੀ ਤਹ ਜਾਤ ਪਇਓ ਸੰਗ ਕੋ ਨਾ ਲਇਓ ਲਖਨਾਰ ਖਰੀ ਰਸਰੀਤ ਪਰੀ ਅਤ ਸੋਭਤ ਹੈ ਲਖ ਲੋਭਤ ਹੈ ਨਿਰਪੇਖੀ ਜਵੈ ਚਤ ਚਉ ਕਬੈ ਏ ਕੌਣ ਜਹੀ ਜਨ ਰੂਪ ਮਈ ਛਭ ਦੇਖ ਛਕਿਓ ਚਤ ਚਾਇ ਚਕਿਓ ਨਿਰਵਿਵਾਹ ਗਈ ਤ੍ਰੀਮੂਨ ਰਹੀ ਰਸਰੀਤ ਰਚਿਓ ਦੂ ਮਹਿਰ ਮਚਿਓ ਬਹੁ ਭੌਤ ਭਜੀ ਨਿਸਲਉ ਨਤ ਜੀ ਦੂ ਰੀਤ ਰਹੇ ਨ ਜਾਰ ਕਹੈ ਕਰਾ ਸਰੀਰ ਤਰਿ ਤੋ ਕਰ ਕੇਲ ਮਤਿਓ ਅਮਤਾਸਨ ਦੇ ਸੁਖ ਰਾਸਨ ਸੇ ਲਲਤਾਸਨ ਲੈ ਵਿਵਿਧ ਹਸਨ ਕਹਿ ਲਲਨਾਰੁ ਲਲਾ ਕਰਖਾਂ ਕਲਾ ਕਰ ਕੇ ਲੂਠੀ ਮਦ ਪਰਨ ਕੂਟੀ ਨਿਬਜਾਤ ਪਇਓ ਤੇ ਗਰਮ ਰਿਓ ਦਿਨ ਕੈਕ ਗਏ ਤਨ ਭੂਰ ਤਨ ਕਉ ਧਰੇ ਸਤ ਸੋਭ ਹਰੇ ਜਨ ਜਵਾਲ ਦਵਾ ਅਸਤੇ ਪਵਾਰਿਖ ਜਉਨ ਪਖੈ ਚਤ ਚੌਗ ਚੱਕੈ ਸੇ ਸਿਆਣ ਪਇਓ ਕਰ ਸੰਗ ਲਿਓ ਚਲੇ ਆਪ ਤਹਾਂ ਤੇ ਤਾਹ ਜਹਾਂ ਨਿਭ ਦੇਖ ਜਪਿਆ ਕਰ ਲਾਜ ਤਬੈ ਜੈ ਮੋ ਨਾ ਸੁੰਗ ਤਰੀ ਕੌਣ ਬਾਜ ਰਾਜ ਅਪ੍ਰਤ ਹਰ ਬੋਲ ਮਨਾ ਛੰਦ ਨਿਰਪਨਾਰ ਸੁਈ ਤਮ ਜੋਨ ਪਜੀ ਮਤ ਬਾਜ ਦਿਓ ਆ ਭੂਲ ਗਿਓ ਤੇ ਚਿਤ ਕਰੋ ਮੋਹਿ ਰਾਜ ਬਰੋ ਤਬ ਕਾਹੇ ਭਜੋ ਅ ਮੋਹਿ ਤਜੋ ਇਹ ਪੁੱਤਰ ਤੂੰ ਅੰਸੁਲ ਸਾਜ ਨਹੀਂ ਸਰਾਪ ਤਜਾ ਭਜ ਕੈ ਮੁਜੈ ਅਬ ਤੋ ਨਾ ਤਜੋ ਨਹੀਂ ਲਾਜ ਲਜੋ ਨਿਰਪਵਾਇ ਤਰੀਆ ਸੋ ਕੋਈ ਚਿੰਨ ਬਤਾਓ ਕੇ ਬਾਤ ਦਿਖਾਓ ਕਹਿ ਯਾਉ ਨਾ ਭਜੋ ਨਹਿ ਨਾਰ ਲਜੋ ਇੱਕ ਮੁੱਤਰ ਕ ਲੈ ਨਿਰਪ ਕਹਿ ਕਰਦਾ ਏ ਇਹ ਦੇਖ ਭਲੇ ਕਸ ਹੇਰ ਤਲੇ ਨਿਰਪ ਜਾਨ ਗਏ ਪਹਿਚਾਨ ਪਏ ਤਬ ਤਾਉਣ ਬਰੀ ਬਹੁ ਭਰੀ ਸਿਰ ਸਾਤ ਭਏ ਰਸ ਰੂਪ ਰਹਿ ਅਮਤੋਜ ਬਲੀ ਦਲ ਦਲੀ ਹਾਨ ਭੂ ਬਲੀ ਜਨ ਭੂ ਥਲੀ ਰਖ ਦੀ ਵਿਦ ਜਗ ਸਜੀ ਸੁਭ ਕਰਮ ਕਰੇ ਅਰ ਪੁੰਝਾਰੇ ਅਤ ਸੂਰ ਮਹਾਨ ਹੈ ਔਰ ਲਹਾ ਅਤ ਜੋਤ ਵਸੈ ਸਸਕ੍ਰਾਂਤਕ ਸਹਿ ਚਾਰ ਚੱਕੀ ਸੁਰ ਨਾਰਛ ਕੀ ਰੂ ਆਲ ਚੰਦ ਘਰ ਘਰ ਐ ਖਰਬ ਗਰਬ ਮਾਰ ਮਾਰ ਨਰੇਸ਼ ਜੀਤ ਜੀਤ ਅਜੀਤ ਰਾਜਨ ਛੀਨ ਦੇਸ ਵਿਦੇਸ ਟਾਰ ਟਾਰ ਕਰੋਰ ਪੱਬੈ ਦੀਨ ਉਤਰ ਦੇਸਾਨ ਸਭਤ ਸਿੰਧ ਭੈ ਤਰਾ ਪਰ ਚੱਕਰ ਰਥਾਨ ਗਾਹੇ ਗਾਏ ਅਗਾਏ ਦੇਸਨ ਵਾਹੇ ਬਾਏ ਹਥਿਆਰ ਤੋਰ ਤੋਰ ਅਤੋਰ ਭੂਦ੍ਰਕ ਦੀਨ ਉਤਰ ਹਟਾਰ ਦੇਸ ਔਰ ਵਿਦੇਸ ਜੀਤ ਵਿ세ਖ ਰਾਜਕਮਾਏ ਅੰਤ ਜੋ ਸੋ ਜੋ ਸੋ ਮਿਲ ਜਾਤ ਪੀ ਪ੍ਰਥਰਾਏ ਜਾਨ ਅੰਤ ਸਮੋਪਿਓ ਪ੍ਰਥਰਾਜ ਰਾਜ ਬਤਾਰੇ ਹੋਰ ਸਰਬ ਸੰਮ੍ਰਿਤ ਸੰਪਤੀ ਮਿੱਤਰ ਮੰਤਰ ਕੁਮਾਰ ਸਬਦ ਦੀਪ ਸੋ ਸਬਦ ਪੁੱਤਰ ਪਾਂਡ ਦੀਨ ਤੁਰੰਤ ਸਬਦ ਰਾਜ ਕਰੈ ਲਗੈ ਸੁਤ ਸਰਬ ਸੋਭਾਵੰਤ ਸਬਦ ਛਤਰ ਫਿਰੈ ਲਗਾਇ ਸਿਰ ਸਬਦ ਰਾਜਕੁਮਾਰ ਸਬਦ ਇੰਦਰ ਪਰੇਤਰਾ ਪਰ ਸਬਦ ਜਾਨ ਸਰਬ ਸ਼ਾਸਤਰ ਧਰੀ ਸਭੈ ਮਿਰ ਬੇத்ਰੀਕ ਵਿਚਾਰ ਦਾਣਿਆ ਸਿਨਕਾਰ ਲੀਨੀ ਅਰਥ ਸਵਰਥ ਸੁਦਾਰ ਖੰਡ ਖੰਡਾ ਖੰਡ ਊਰਵੀ ਬਾਟ ਲੀਨ ਕੁਮਾਰ ਸਬਦ ਦੀਪ ਹੈ ਪੁਨਰ ਨਵ ਖੰਡ ਨਾਮ ਵਿਚਾਰ ਜੇਸ਼ਟ ਪੁੱਤਰ ਧਰੀ ਤਰਾਤੇ ਪਰਥ ਨਾਮ ਬਖਾਨ ਪਰਧ ਖੰਡ ਬਖਾਨ ਹੀ ਦਾ ਚਾਰ ਚਾਰ ਨਿਦਾਨ ਕੌਣ ਕੌਣ ਕਹੈ ਕਵੈ ਕਵਿ ਨਾਮ ਠਾਮ ਅਨੰਤ ਬਾੜ ਨਵ ਖੰਡ ਦੀਪ ਦੁਰੰਤ ਠਾਮ ਠਾਮ ਪੈ ਨਰਾਦ ਵਿਠਾਮ ਨਾਮ ਅਨੇਕ ਕੌਣ ਕੌਣ ਉਚਾਰਿਐ ਕਰ ਸੂਰ ਸਰਬ ਵਿਵੇਕ ਦੀਪਨ ਸਬਦ ਭੂਪ ਬਗਾ ਲਗਾਇ ਨਵਖੰਡ ਪਾਂਥ ਪਾਂਥ ਤਨਸੂ ਫਿਰੇ ਅਸੀਂ ਬਾਧ ਜੋਦ ਪ੍ਰਚੰਡ ਦੀਹ ਦੀਹ ਅਜੀਹ ਦੇਸਨ ਨਾਮ ਆਪਨ ਆਏ ਆਣ ਜਾਣ ਦਤੀ ਪੈ ਛੇ ਦੂਸਰੇ ਹਰੀ ਰਾਏ ਆਪ ਆਪ ਸਮੈ ਸਵੈ ਸ੍ਰੀ ਅਤਰ ਪਤਰ ਫਿਰਾਏ ਜੀਤ ਜੀਤ ਹੈ ਜੀਤ ਜੋਦਨ ਰੋਹ ਕ੍ਰੋਹ ਕੁਮਾਇ ਝੂਠ ਸਾਚ ਅਨੰਤ ਬੋਰ ਕੋਲੋਰ ਕੇਲ ਅਨੇਕ ਅੰਤਕਾਰ ਸਵੈ ਪਛੈ ਜਗ ਛਾੜਿਆ ਨਹਿ ਏਕ ਆਪ ਅਰਥ ਅਨਰਥ ਅਪਰਥ ਸਮਰਥ ਕਰਤ ਅਨੰਤ ਅੰਤ ਹੋਤ ਛਟੀ ਕਛੂ ਪ੍ਰਭ ਕੋਟ ਕਿਉ ਨਾ ਕਰੰਤ ਜਾਨ ਬੂਝ ਪਰੰਤ ਕੋ ਬਲਹੰਤ ਮੂੜ ਨ ਭੇਵ ਅੰਤਕਾਲ ਤਵੈ ਬਚੈ ਜਬ ਜਾਨ ਹੈ ਗੁਰਦੇਵ अंत होत छठी बली प्रभु लोग न जान आप अर्थ पहचानहि तजहि देव निधान धर्म जान करंत पापन पाप न जानत मूड सर्व काल धयार को कहा प्रयोग गूढ़ अगूढ़ पाप पुण्य पहचानहि कर पुण्य की सम पाप परम जान पवित्र जापन जपै लाग कु जाप सिद्ध ठौर न मानहि बिन सिद्ध ठौर पूजंत हाथ दीपक लै महा पास परंत सिद्ध othor ਨਾ ਮਾਨਹੀ ਅਨਸਿਧ ਪੂਜਤ othor ਕੈਕ ਦੇਵ ਚਲਾ ਜੇ ਜੜ ਭੀਤ ਕੀ ਸੀ ਦੌਰ ਪੰਖਹੀਨ ਕਹਾ ਉਡੈ ਅਰ ਨੈਨਹੀਨ निहार शस्त्रਹੀਨ ਜੁਧਾਨ ਪੈਠਬ ਅਰਥਹੀਨ ਵਿਚਾਰ ਦਰਵਹੀਨ ਵਪਾਰ ਜੈਸਿਕ ਅਰਥ ਬਿਨ ਇਸ ਲੋਕ ਆਂਖਹੀਨ ਬਿ ਲੋਕ ਬੋਜਗ ਕਾਮ ਕੇ ਇਲਾ ਕੋਕ ਗਿਆਨਹੀਨ ਸੋ ਪਾਠ ਗੀਤਾ ਬੁੱਧਹੀਨ ਵਿਚਾਰ ਹਿੰਮਤਹੀਨ ਜੁਧਾਨ ਜੂਜਬ ਕੇਲਹੀਨ ਕੁਮਾਰ ਕੌਣ ਕੌਣ ਗਨਾਈਐ ਜੇ ਪੈ ਭੂਪ ਮਹੀਪ ਕੌਣ ਕੌਣ ਸੋ ਕਥਿਐ ਜਗ ਕੇ ਸੋ ਦਵੀਪ ਅਦਵੀਪ ਜਾਸ ਕੀ ਨਾ ਗਨਐ ਬਹਿ ਔਰ ਕੀਨੀ ਸ਼ਕਤ ਨਾ ਭਗਤ ਸ੍ਰੇਸ਼ਟ ਸ੍ਰੇਸ਼ਟ ਪੈ ਜਿਤੇ ਇਹ ਭੂਮ ਆਨ ਨਰੇਸ਼ ਤਾਉਨ ਤਾਉਨ ਵਿਚਾਰ ਹੋ ਤੁਮਰੇ ਪ੍ਰਸਾਦ ਅਸੀਸ ਪਰਥ ਰਾਜ ਬਤੀਤ ਪੈ ਰਾਜ ਸਾਗਰ ਰਾਜ ਰੁਦਰ ਕੀ ਤਵ ਸਾਖੀ ਲੀ ਲਛ ਸੋਤ ਉਪਰਾਜ ਚੱਕਰ ਬੱਕਰ ਤੂੰ ਜਾਗਦਾ ਆਪਰਾ ਸਰਵ ਰਾਜਕੁਮਾਰ ਲਛ ਰੂ ਧਰੇ ਮਨੋ ਜਗਿਆਨ ਮੈਨ ਸੁਧਾਰ ਵੇਖ ਵੇਖ ਬਣੇ ਨਰੇਸੋ ਜੀਤ ਦੇਸ ਅ세ਸ ਦਾਸ ਭਾਵ ਸਵੇ ਧਰੇ ਮਨ ਜਤਰ ਤਤਰ ਨਰੇਸ ਬਾਜ ਮੇਰ ਕਰੇ ਲਗੇ ਹੈ ਸਾਲ ਤੇ ਹੈ ਚੀਨ ਬੋਰ ਬੋਰ ਅਮੋਲ ਰਿੱਤਜ ਮੰਤਰ ਮਿੱਤਰ ਪ੍ਰਵੀਨ ਸੰਗ ਦੀਨ ਸਮੂਸੈਨਾ ਬਿਹੁ ਬਿਹੁ ਬਨਾਏ ਜਤਰ ਤਤਰ ਫਿਰੇ ਲਗੇ ਸਿਰ ਅਤਰ ਤਤਰ ਫਿਰਾਏ ਜੋਤ ਪੱਤਰ ਲਹਿਓ ਜਹਾਂ ਤਾ ਸੱਤਰ ਭੇ ਸਭ ਚੂਰੇ ਛੋੜ ਛੋੜ ਭਜੇ ਨਰੇਸਨ ਛਾੜ ਸ਼ਸਤਰ ਕਰੂਰ ਡਾਰ ਡਾਰ ਸਨਾਹੇ ਸੂਰ ਤ੍ਰਿਆਣ ਭੇ ਸੁਧਾਰ ਭਾਜ ਭਾਜ ਚਲੇ ਜਹਾਂ ਤਾ ਪੁੱਤਰ ਮਿੱਤਰ ਵਿਸਾਰ ਗਾਜ ਗਾਜ ਗਜੇ ਗਦਾ ਤਰ ਭਾਜ ਭਾਜ ਸੋ ਭੀਰ ਸਾਜ ਬਾਜ ਤਜੇ ਪਦੇ ਬ ਸੰਭਾਰ ਸੂਰ ਵੀਰ ਗਜੇ ਜਹਾਂ ਤਾ ਅਸਤਰ ਸ਼ਸਤਰ ਨਚਾਏ ਜੀਤ ਜੀਤ ਲੈ ਸੋ ਦੇਸਨ ਜੈਤ ਪੱਤਰ ਫਿਰਾਏ ਜੀਤ ਪੂਰਬ ਪਛਮੰਗ ਅਰਲੀਨ ਦੱਖਣ ਜਾਏ ਤਾਕ ਬਾਜ ਚਲਿਓ ਤਾਂ ਜਾਂ ਪੈਠ ਮੇ ਮੋਨ ਰਾਏ ਧਿਆਨ ਮਦੂ ਤੇ ਸਾਜ ਬਾਜ ਨਾ ਦੇਖ ਪਿਸ਼ਟ ਪਾਜ ਖਰੋਪ ਰਿਖ ਜਾਨ ਗੋਰਖ ਭੇਖ ਚੌਕ ਚਿਤ ਰਹੇ ਸਵੇ ਜਬ ਦੇਖ ਨੈਣ ਨਾ ਬਾਜ ਖੋਜ ਖੋਜ ਥਕੇ ਸਵੇ ਦਿਸ ਚਾਰ ਚਾਰ ਸਲਾਜ ਜਾਨ ਪਇ ਅਰਗ ਉਤਰੰਗ ਵਕੀਨ ਵਿਚਾਰ ਸਗਰ ਖਾਦ ਖੁਦਾ ਲਗੇ ਰਣ ਧੀਰ ਬੀਰ ਅਪਾਰ खोद खोदेय खोद पृथ्वी क्रोध झोद अनंत भज भज गए सबे मुख मृतका दुत्वंत सगर खाद खुदै लगे दिस खोद दक्षिण सर्व जीत पूर्व को चले अदठान काय जी गर्भ खोद दक्षिण की दिशा पुन खोद पूर्व दिशान ताग पश्चिम को चले द चार चार निदान पैठ उत्तर दिशा जवे खोद लगे सब ठौर और और पशु काल काल ठाटी और भूत कैबो पांत पृथ्वी पूज अर्ध दिशान अंत भेद बिलोकिया मुनि बैठ संजुत ध्यान पृष्ठपाश ਸਮਾਜ समाज रूप अनूप लात बे उन मारयो अद गर्भ कै सुत भूप ध्यान छूटत बे मुनि दीर्घ ज्वाल माल कराल पांत पांतन सो उठि जन सिंध आग विशाल भसम पूत भए सबे निप्लच्छ पुत्र सो नयन बाजराज सो संपदा ज्योते अस्त्र शस्त्र ससैन ਮਾਧੁ ਭਾਰ ਚੰਦ ਪੈ ਪਸੰਪੂਤ ਨੇ ਸਰਬ ਪੂਤ ਜਿਤ ਸੂਤ ਸਹਿਣ ਸੁੰਦਰ ਸੋਬੈਨ ਸੋਭਾ ਆਪਾਰ ਸੁੰਦਰ ਕੁਮਾਰ ਜਬ ਜਰੇ ਸਰਬ ਤਬ ਤਜਾ ਗਰਭ ਬਾਹੂ ਅਜਾਨ ਸੋਭਾ ਮਹਾਨ ਦਸ ਚਾਰ ਮਨਸੂਰਾ ਦੁਰੰਤ ਜਰ ਭਾਜ ਬੀਰ ਹੋਇ ਚੇਤ ਅਧੀਰ ਦਿਨੋ ਸੰਦੇਸ਼ ਜਾ ਸਗਰ ਦੇਸ ਲੈ ਸਗਰ ਬੀਰ ਬਹਿ ਚੇਤ ਅਧੀਰ ਪੁੱਛੇ ਸੰਦੇਸ਼ ਪੂਤਨ ਸੋਬੇਸ ਕਰ ਜੋਰ ਸਰਬ ਪੜ ਛੋਰ ਗਰਭ ਉਚਰੇ ਬੈ ਜਲ ਚੁਤ ਊ ਫੇਰ ਬਾਜ ਜਿਨ ਸਰਬ ਰਾਜ ਸਭ ਸੰਗ ਦੀ ਢੇ ਪਰ ਹੈ ਗਇਓ ਪਿਆਰ ਤੋ ਸੁਤ ਉਦਾਰ ਹੂਖ ਹੋ ਸਰਬ ਅਤ ਬਡਾ ਗਰਭ ਤਹ ਮੂਨਿ ਅਪਾਰ ਗੁਣ ਕਨ ਉਦਾਰ ਲਖ ਮਦ ਧਿਆਨ ਮਹਾਨ ਤਬ ਪੁੱਤਰ ਕਰੋਧ ਲੈ ਸੰਗ ਜੋਧ ਲਤਾਂ ਪ੍ਰਹਾਰ ਕੀ ਰੇਖ ਅਪਾਰ ਤਬ ਛੁਟਾ ਧਿਆਨ ਮੂਨ ਮਹਾਨ ਨਿਕਸੀ ਸੋ ਜਵਾਲ ਦਾਵਾ ਵਿਸਾਲ ਜਹਦਰੇ ਪੂਤ ਕੈ ਐਸ ਦੂਤ ਸਹਿਨਾਸ ਮੇਦ ਬਾਚਾ ਨਾ सुन पुत्र नास, भयो पुर उदास जह लोग बैठे सो सोग। शिव सिमर बैन जल थाम नयन कर धीर चित्त मुन मन पवित तिन मृतक कर्म निरप कर्म धर्म बहु रीत किन्नी सो प्रीत निरप पुत्र शोक गयो स्वर्ग रोग निरप पे जौन कथ सके कौन इथ श्री विचित्र नाटक ग्रंथे ब्रह्मा अवतार राजा प्रित को अथ जुजात राज आगौ राजकथन वधपार छंद उनभयो जुजात शोभा अवहात दश चारवंत शोभा सुवंत सुंदर सोनैन जन रूपमेन शोभा अपार शोभा सुधार सुंदर सुरूसो भंत भूप दश चारवंत आभा अवहंत गुणगण अपार सुंदर उदार दश चारवंत शोभा सुवंत तन गुण प्रवीण प्रभु को अधीन शोभा अपार सुंदर कुमार शास्त्रज्ञ सुद्ध क्रोधी सो युद्ध निप्भयो बिन जन काम धीन खूनी सुखagg जो दाया भग खत्री अखंड क्रोधी प्रचंड शत्रुण काल का ढीकरवाल सम तेज ज्वाला समान जब जुरत जंग नह मूर्ति अंग अर भय तनेक नह टिकत एक कंपत देसान मंडत मवास पज्जत उदास ਹਰ ਹਰਥ ਵੀਰ ਭੰਪਰਤ ਪੀਰ ਤੰਤਜਿਤ ਦੇਸ ਨਿਰਪਮਨ ਨਰੇਸ ਚੰਚਕਤ ਚੰਦ ਧੰਤਕਤ ਇੰਦ ਫਲ ਗਨਫਟੰਤ ਭੂ ਤਰਪਜੰਤ ਸੰਜਤਾ ਛੰਦ ਜਸ ਠੌਰ ਠੌਰ ਸਭੋ ਸੁਨਿਓ ਅਰ ਬ੍ਰਿੰਦ ਸੀ ਸਭੋ ਤੁਨਿਓ ਜਗ ਜਗ ਸਾਜ ਭਲੇ ਕਰੇ ਦੁਖ ਉੰਜ ਦੀਨਨ ਕੇ ਹਰੇ ਇਤ ਜੁਜਾਤ ਰਾਜਾ ਕਾਲ ਬਸ ਹੋਤ ਅਥ ਬੇਲ ਰਾਜੇ ਗੋ ਰਾਜ ਕਥਨ ਸੰਜਤਾ ਛੰਦ ਉਹ ਬੇਂ ਰਾਜ ਮਹੇਸ਼ ਉਹਨੇ ਦੰਡ ਕਾਹੂ ਤੇ ਨਾ ਲਿਓ ਜੀ ਭਾਂਤ ਭਾਂ ਸੁਖੀ ਨਰਾ ਅਤ ਗਰਭ ਸਭ ਛੁਟ ਉਰਤਰਾ ਜੀ ਭਾਂਤ ਬਾਤ ਬਸੇ ਸੁਖੀ ਤਰ ਦ੍ਰਿਸ਼ਟਿ ਆਵਤ ਨਾ ਦੁਖੀ ਸਭ ਠੌਰ ਠੌਰ ਪ੍ਰਥਵੀ ਜਨ ਭੂਮ ਰਾਜ ਸ੍ਰੀ ਲਸੀ ਇਹ ਭਾਂਤ ਰਾਜ ਕਮਾਇ ਕੈ ਸੁਖ ਦੇਸ ਸਰਬ ਕੈ ਬੋ ਦੁਖ ਦੀਨਨ ਸੁਨ ਸ਼ਕਤ ਦੇਵ ਸਮਸਤ ਭੈ ਬੋ ਰਾਜ ਸਾਜ ਕਮਾਇ ਕੈ ਸ੍ਰੀ ਅਤਰ ਪਤਰ ਫਿਰ ਕੈ ਕਉਨ ਜੋਤ ਜੋਤ ਵਿਖੈ ਮਲੀ ਯਰ ਛੇਨ ਬੇਨ ਮਹਾਬਲੀ ਅਵਿਕਾਰ ਭੂਪ ਜਿਤੇ ਪਏ ਕਰ ਰਾਜ ਅੰਤ ਸਮੈ ਗਏ ਕਬ ਕਉਨ ਨਾਮ ਤਿਨ ਆਗਨ ਸੰਕੇਤ ਕਾਹੇ ਇਤੇ ਭਨੈ ਬੇਨ ਰਾਜਾ ਅੰਮ੍ਰਿਤ ਬਸ ਹੋਤ ਭਏ ਅਥਮਾਨਤਾਤਾ ਗੋ ਰਾਜ ਕਥਨੰ ਦੋਧਿਕ ਛੰਦ ਜੇਤਕ ਭੂਪ ਹੈ ਪਰ ਨਾਮ ਸੁਕੈ ਤਿਨ ਕੋ ਧਰ ਨਾਮ ਜਥਾ ਮਤਿ ਭਾਗ ਚਿਤ ਤਉ ਆਪਣੇ ਡਰ ਪਾਉ ਬੇਨ ਗਾਇ ਜਗ ਤੇ ਨਿਰਭਤਾ ਕਰ ਮਾਨ ਤਿਆਤ ਭੈ ਬਸੁਦਾ ਧਰ ਬਾਸਵ ਲੋਗ ਗਏ ਜਬ ਹੀ ਵਾ ਉਠਦਿਓ ਅਰਧਾਸਨ ਬਾਸਵ ਤੇ ਰੋਸ ਭਰਿਓ ਤਾ ਮਾਨ ਮਹੀਤਰ ਹਾਂ ਗਇਓ ਕਰਖਗ ਭਿਆੰਕਰ ਮਾਰਨ ਲਾਗ ਜਵੈ ਰਸਿੰਦਰਾਏ ਬਾਹ ਗਈ ਤਤਕਾਲ ਦੇ ਜਿੰਦਰਾਏ ਨਾਸ ਕਰੋ ਜਿਨ ਬਾਸਵ ਕੋ ਨਿਰਪ ਆਸਨ ਅਰਧ ਦਇਓ ਤੋ ਯਾਵ੍ਰਤ ਹੈ ਲਵਨਾ ਸਰਮਹਾਸਰ ਭੂਵੀ ਪਰ ਤਾਹੇ ਨਾ ਮਾਰ ਸਕੈ ਤੁਮ ਕਿਓ ਕਰ ਜੋ ਤੂੰ ਤਾਇ ਸੰਘਾਰ ਕੈ ਆਵੋ ਤੋ ਤੁਮ ਇੰਦਰ ਸਿੰਘਾਸਨ ਪਾਵੋ ਐਸ ਕੈ ਅਰਥ ਸਿੰਘਾਸਨ ਬੈਠੋ ਸਾਜ ਕਹੋ ਪਰਨਾਕ ਨਾ ਐਠੋ ਅਸਤਰ ਛੰਦ ਤਾਇਓ ਕੈ ਤਹਾ ਮਥਰਾ ਮੰਡਲ ਕਾਨੋ ਥਾਜਾ ਹਮਾ ਗਰਵ ਕਹਿ ਕੈ ਮਹਾ ਮੰਦ ਬੁੱਧੀ ਮਹਾ ਜੂਰ ਕਹਿ ਕੈ ਤਲੰ ਪਰਮ ਕ੍ਰੁੱਧੀ ਮਹਾ ਕੋਹਰ ਕਹਿ ਕੈ ਘਨੰ ਕੀ ਕਟਾਜੋ ਸੁਤਾਇਆ ਰਣੰ ਬਿਜਲੀ ਕੀ ਛਟਾਜੋ ਸੁਨੇ ਸਰਬਦਾਨੋ ਸੋ ਸਾਮੇ ਸਿਧਾਏ ਕ੍ਰੋਧ ਕਹਿ ਕੈ ਸੋ ਨਚਾਏ ਮੇਧਿਕ ਛੰਦ ਅਬ ਏਕੀਏ ਬਿਨ ਯੋ ਨ ਟਰੇ ਤੋ ਦਾਤਨ ਪੀ ਸੰਹਾਰ ਪਰੈ ਜਬ ਲੌਰਨ ਸੁਨੋ ਲਵ ਖੇਤ ਮਰਾ ਤਬ ਲੌਰਨ ਲਖੇ ਰਣ ਬਾਂਟਰਾ ਅਬ ਹੀ ਰਣ ਏਕ ਕੀਏ ਕਰੈ ਬਿਨ ਏਕ ਕੀਏ ਰਣ ਤੇ ਬਹੁ ਸਾਲ ਸਿਲਾ ਤਲ ਬ੍ਰਿਛ ਛੁਟੇ ਦੂਰ ਜਬੈ ਰਣ ਵੀਰ ਜੁਟੇ ਕੁਪ ਕਹਿ ਲਵ ਪਾਣ ਤਰਸੂਲ ਲਿਓ ਸਿਰ ਧਾਤੈ ਮਾਨ ਦੁਖੰਡ ਕਯੋ ਬਹੁ ਜੂਥ ਪਜੂਥਨ ਸੈਨ ਪਜੀ ਨਾ ਉਚਾਇ ਸਕੈ ਸਿਰ ਜੀ ਕਾਨ ਜੈਸ ਭਜੇ ਕਨ ਘਾਇਲ ਹੋਇ ਬਰਖਾ ਜਿਮ ਸ੍ਰੋਣਤ ਧਾਰ ਚੁਐ ਸੁਭ ਮਾਨ ਮਹੀ ਪਦ ਛੇਤ ਰਹਿਦੈ ਸਭ ਹੀ ਦਲ ਭਾਗ ਚਲਾ ਜੀ ਲੈ ਇੱਕ ਹੂਮਤ ਕਾਇਲ ਸੀਸ ਫੁਟੇ ਇੱਕ ਸ੍ਰੋਣ ਚੁਚਾਵਤ ਕੇਸ ਛੁਟੇ ਰਣ ਮਾਰ ਕੈ ਮਾਨ ਤਿਸੂਲ ਨੀਏ ਭਟ ਭਾਂਤਾ ਭਾਂਤ ਭਜਾਇ ਦिए ਇਤਮਾਨ ਭਾਤਾ ਬਧੈ